ਸ਼ਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੀਤਲ ਜੇ ਮਿਲੈ ਫਿਰ ਜਲੇ ਨਾ ਦੂਜੀ ਵਾਰ ਰਿਕਨਾ ਦੀ ਅੱਧੀ ਜੜਾਈ ਹੋਈ ਸਾਡੀ ਵੀ ਅੱਧੀ ਜੜੀ ਹੋਈ ਅੱਧੀ ਕਸ਼ੀ ਹੋਈ ਕੋਲੇ ਨਹੀਂ ਹੋਇਆ ਸੁੱਕੀ ਵੀ ਨਹੀਂ ਲੱਕੜੀ ਦਾਦੀ ਹੁੰਦੀ ਜਲਦੀ ਦਾਦੀ ਲੱਕੜੀ ਛਾੜੀ ਕਰੇ ਪੁਕਾਰ ਜਾ ਲੈ ਤੂੰ ਜੀਵਾਰ ਦੂਜੀ ਵਾਰ ਜਲਸਾ ਦੇ ਵਿੱਚ ਅੱਗ ਹੁੱਤੀ ਏ ਤੇ ਰਿchnਾ ਆਦੀ ਜਲ ਗਈ ਨਾਲ ਜਾ ਲੈ ਕਰੇ ਮੈਨੂੰ ਜਲ ਮੈਨੂੰ ਨਾਭੂ ਵਰਤ ਮੈਨੂੰ ਗਿਆਨ ਵਰਤ ਮਿਲਦੀ ਤਾਂ ਕਿ ਚੱਲਣਾ ਇੱਥੇ ਬੁੱਝਵੇ ਫੇਰ ਹੜੀ ਹੋ ਸਕਦੀ ਐ ਜੋ ਐਡੀ ਦੀ ਗੜੀ ਐ ਹੜੀ ਫੇਰ ਹੋ ਸਕਦੀ ਸਤਗੁਰ ਸੀਤਲ ਜੇ ਮਿਲੇ ਫਿਰ ਜਲੇ ਨ ਦੂਜੀ ਵਾਰ ਸਤਗੁਰ ਸੀਤਲ ਜੇ ਰੋਜ ਜਾਂਦੀਆਂ ਨੇ ਦੇਖਦੀਆਂ ਅੱਜ ਦਾ ਗਿਆਨ ਆ ਸਾਹਮਲੇ ਜਿਹੜਾ ਠੀਤਲ ਕਰ ਦਵੇ ਮਨ ਨੂੰ ਉਹਦੀ ਠੀਕ ਦੋ ਸ਼ਾਂਤ ਹੋਈ ਹੋਈ ਅਗੋਂ ਦੁਬਾਰਾ ਸੁਲਗਦੀ ਨਹੀਂ ਹੈ ਠੀਕ ਹੈ ਜੀ ਸੁਲਗੂ ਤਾਂ ਜੜੂ ਹਾਂ ਜੀ ਹਨਕ ਬਿਨ ਨਾਮ ਹੈ ਨਿਰਭਉ ਕੋ ਨਹੀਂ ਜਿੱਚਰ ਸ਼ਬਦ ਨਾ ਕਰੇ ਵਿਚਾਰ ਨਵਾ ਹਤੇ ਬਣਾ ਦੇਰ ਕੋਈ ਹੋਇਆ ਜਿੰਨਾ ਕਿ ਸ਼ਬਦ ਵਿਚਾਰ ਨਹੀਂ ਕਰਦਾ ਉਸਾਂ ਕਿ ਆਮਦੀ ਮਿਲਦਾ ਨਾ ਉਹ ਤੋਂ ਮਿਲੂ ਦੇਰ ਕੋ ਸ਼ਬਦ ਵਿਚਾਰ ਚੋਂ ਆਮਦੀ ਪ੍ਰਾਪਤੀ ਹੈ ਆਮਦੀ ਪ੍ਰਾਪਤੀ ਬਿਨਾਂ ਮਿਲ ਠੀਕ ਹੈ ਜੀ ਮਹੱਲਾ ਤੀਜਾ ਭੇਖੀ ਅਗਨ ਨਾ ਬੁਝੈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸੱਪ ਨਾ ਮਰੇ ਕਿਉਂ ਨਿਗਰੇ ਕਰਮ ਕਮਾਏ ਤੇਠੀ ਅਗਨ ਦਾ ਬੁਝੀ ਪੇਖ ਕਿੰਨੇ ਬਣਾਏ ਨੇ ਅੱਗ ਬੁਝਦੀ ਨਹੀਂ ਹੈ ਇਹੇ ਚਿੰਤਾ ਮੁੱਤ ਵਿੱਚ ਤੇਗ ਹੈ ਨਾ ਕੁਰਬਾਨੀ ਆਏ ਦੀ ਅਗ ਦਾ ਬੁਝਣਾ ਹੈ ਕੁਰਬਾਨੀ ਨਾਲ ਠੀਕ ਹੈ ਤੇਗ ਬਥੇਰੇ ਨੇ ਕੁਰਬਾਨੀ ਹੈ ਦੀ ਕੁਰਬਾਨੀ ਦੀ ਲੋਝੀ ਹੈ ਇਸ ਕਰਕੇ ਚਿੰਤਾ ਹੈ ਕੁਰਬਾਨੀ ਤੋਂ ਬਿਨਾਂ ਅੱਗ ਦੀ ਬੁਝੜੀ ਪੇਖ ਦੀ ਲੋੜ ਦੀ ਹੈ ਗੁਰਬਾਣੀ ਨੀ ਸ਼ੋਜੀ ਬਣਾ ਕੇ ਦੀਵੂਜੀ ਬਦਲ ਬਦਲ ਦੇਖ ਲੈ ਤੇ ਇੱਕ ਬਦਲ ਬਦਲ ਦੇਖ ਲੈ ਅਕਦੀਬੂਜੀ ਠੀਕ ਹੈ ਜੀ ਭੇਖ ਦੀ ਲੋੜ ਨਹੀਂ ਸੀ ਗਿਆਨ ਦੀ ਲੋੜ ਸੀ ਪਰ ਅਸੀਂ ਭੇਖ ਧਾਰ ਲਿਆ ਗਿਆਨ ਛੱਡਦਾ ਜੀ ਉਹ ਬਦਲ ਬਦਲ ਦੇਖਿਆ ਵੀ ਹੋ ਜਾਏ ਸ਼ਾਇਦ ਇਸ ਤੇ ਖਾਲ ਹੋ ਜਾਏ ਗੱਲ ਨਹੀਂ ਬਣੀ ਭੇਖ ਨਾਲ ਠੀਕ ਹੈ ਜੀ ਵਰਮੀ ਮਾਰੀ ਸਪਨਾ ਮਰੇ ਤੇ ਉਹ ਨਿਗੁਰੇ ਕਰਮ ਕਮਾਏ ਸਰੀਰ ਦਾ ਸਾਡਾ ਵਰਮੀ ਹੈ ਹੂੰ ਮਨ ਦੀ ਮਨੂ ਦੀ ਸੱਪੇ ਦੇ ਵਿੱਚ ਹੈ ਆਵੇਂ ਦਾ ਵਰਮੀ ਦੇ ਉੱਤੇ ਕੱਪੜੇ ਪਾਈ ਜੋ ਭੇਖ ਬਣਾਈ ਜੋ ਆਵੇਂ ਵਰਮੀ ਦੀ ਪੂਜਾ ਕਰੀ ਜੋ ਆਵੇਂ ਵਰਮੀ ਨੂੰ ਕੁੱਟ-ਕੁੱਟ ਮਾਰੀ ਜੋ ਕੋਈ ਵਰਮੀ ਨੂੰ ਦੁਖੀ ਵੀ ਕਰਦੇ ਸਰੀਰ ਦੇ ਦੁੱਖ ਵੀ ਛੱਲਦੇ ਦੇਣਾ ਪਰ ਸੱਪ ਤੇ ਕੋਈ ਅਸਰ ਨਹੀਂ ਪੈਂਦਾ ਵਰਮੀ ਦਾ ਭੇਖ ਬਣਾ ਲਓ ਬਰਵੀ ਤੇ ਦੁੱਧ ਪਾਈ ਜਾਓ ਬਰਵੀ ਬਰਮੀ ਦੀ ਪੂਜਾ ਕਰੀ ਜਾਓ ਛੱਪ ਤੇ ਗਿਆ ਸਾਰਾ ਬਰਮੀ ਦਾ ਬਰਮੀ ਤੇ ਛੱਟੀ ਲੱਗਦੀ ਮਾਰੀ ਤੇ ਛੱਪ ਤੇ ਵਾਰੀ ਤਿਉ ਨਿਗਰੇ ਕਰਮ ਕਮਾਹੇ ਇਸ ਤਰੀਕੇ ਨਾਲ ਨਿਗਰੇ ਕਰਮ ਕਰਦੇ ਠੀਕ ਦਾ ਜੁੜਨਾ ਬਰਮੀ ਨਾਲ ਜੁੜਦੇ ਠੀਕ ਨਾਲ ਜੁੜਨਾ ਨਹੀਂ ਠੀਕ ਹੈ ਜੀ ਸਤਗੁਰ ਦਾਤਾ ਸੇਵੀ ਐ ਸ਼ਬਦ ਵਸੇ ਮਨ ਆਏ ਮਨ ਤਨ ਸੀਤਰ ਸਾਥ ਹੋਏ ਕ੍ਰਿਸ਼ਨ ਅਗਨ ਬੁਝਾਏ ਸੇਵਾ ਕੀਤੀ ਕਲ ਨਹੀਂ ਦੀ ਸਤਗੁਰ ਦੀ ਸੇਵਾ ਐ ਨਹੀਂ ਦੀ ਵੀ ਫਰਕ ਐ ਜੀ ਜੋ ਸਤਗੁਰ ਕਹਿੰਦਾ ਸਾਨੂੰ ਉਹ ਕਰ ਲਈ ਦੀ ਸੇਵਾ ਹੈ ਦੀ ਦੱਸੀ ਹੋਈ ਕਾਰ ਕਰਨੀ ਸਤਗੁਰ ਦੀ ਸੇਵਾ ਹੈ ਠੀਕ ਹੈ ਜੀ ਸਤਗੁਰੂ ਕਾਟਾ ਉਰ ਪੱਕਾ ਫੇਰਨਾ ਸਤਗੁਰੂ ਵਾਸਤੇ ਪਾਣੀ ਲਿਆਉਣਾ ਉਹਨੇ ਮੂਰਤੀ ਚਾਪੀ ਕਰਦੀ ਉਹਦੇ ਤੇਲ ਚਸਣਾ ਆ ਉਹਦਾ ਕੋਈ ਹੋਰ ਕੰਮ ਕਰਨਾ ਜੰਦਾ ਖਾਣ ਜੰਦਾ ਪਹਿਨਣਾ ਦੇਣਾ ਜਿਵੇਂ ਅਸੀਂ ਇਹ ਇਹ ਦੀ ਸੇਵਾ ਨਹੀਂ ਹੈ ਸਤਗੁਰ ਤਾਂ ਨਿਰਕਾਰ ਆਉਦੀ ਸੇਵਾ ਤੇ ਬਹਿ ਜੂਗੀ ਦਾ ਨਾਮ ਜਪਣਾ ਨਾ ਮਰਦਾ ਸਤਗੁਰ ਦੀ ਸੇਵਾ ਹੈ ਜਿਹੜੀ ਸਤਗੁਰ ਨੇ ਸੇਵਾ ਸਾਡੇ ਲਾਈ ਹੈ ਗੁਰ ਕਾ ਹਿਆਸਾ ਕਾਰਕ ਬਾਵੋ ਇਹ ਸਤ ਗੁਰੂ ਦੀ ਸੇਵਾ ਤੇ ਸਾਡੂ ਕਹਿੰਦਾ ਐ ਕਰੋ ਉਹ ਉਹੀ ਕਰਨਾ ਉਹੀ ਸਤ ਗੁਰੂ ਦੀ ਸੇਵਾ ਸਤ ਕਾਰਕ ਬਾਵਣੀ ਹਾਂ ਨਹੀਂ ਕਾਰਕ ਬਾਵਣੀ ਵੀ ਉਹਦੀ ਸੇਵਾ ਹੋਜੀ ਠੀਕ ਹੈ ਜੀ ਸਤ ਦਾਤਾ ਸੇਵੀ ਹੈ ਸ਼ਬਦ ਵਸੈ ਮਨਿ ਆਈ ਸਤ ਦਾਤਾ ਹੈ ਉਹ ਜਿਹੜੀ ਉਹ ਸੇਵਾ ਦਸੂਗਾ ਉਤੋਂ ਸਾਨੂੰ ਉਸ ਪ੍ਰਾਪਤ ਹੋਊਗਾ ਸਤਗੁਰ ਨੇ ਜੋ ਸਾਨੂੰ ਦੱਸ ਰਿਹਾ ਨੇ ਕਰੋ ਉਹ ਜੋ ਵੀ ਪ੍ਰਾਪਤੀ ਹੋਣੀ ਹੈ ਆਪੇ ਦਾਤਾ ਹੋ ਗਿਆ ਠੀਕ ਹੈ ਮਨ ਤਨ ਸ਼ੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਈ ਅਸੋ ਚਾਹੀਦੀ ਸੀ ਨਾ ਮਨ ਤਨ ਸ਼ੀਤਲ ਉੰਗੜੀ ਤੇ ਦੀ ਸੇਵਾ ਦੱਸੇ ਤੇ ਸਤਗੁਰ ਤੇ ਸਤੂਰ ਦੇ ਪਾਣੀ ਚੱਲੇ ਤੇ ਸਤੂਰ ਦਾ ਖੰਬ ਜਿੱਤੇ ਕਬ ਚਰ ਜੂਗਾ ਤ੍ਰਿਸ਼ਨਾ ਦੀ ਇਹਨੂੰ 부ਝੂਗੀ ਅੱਗੋਂ ਨਹੀਂ ਜਲਦਾ ਹੁਣ ਮਨ ਠੀਕ ਹੈ ਜੀ ਚਰਨ ਗੋਝੂਗੀ ਹੁ ਸੁੱਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖੀ ਉਦਾਸੀ ਸੋ ਕਰੇ ਹਾਂਜੀ ਇਹਨਾਂ ਸੁੱਖਾਂ ਦੇ ਸਾਰਿਆਂ ਨੇ ਸਰੋਪਣੀ ਸੁੱਖ ਜਾਂਦੇ ਆ। ਉਹ ਸੁੱਖਾਂ ਦੇ ਸਿਰ ਤੇ ਸੁੱਖ ਫਿਰ ਤਿਛਾ ਸਾੜਦੀ ਹੈ। ਸੁੱਖਾਂ ਦੇ ਸਿਰ ਸੁੱਖ ਹੈ। दुखਾਂ सिर सदा सुख होए जा विचों आप गवाए कहले हमने बिक्कां ਛੱਡ ਦਿੰਦਾ ਆਪਣੀ ਮਰਜ਼ੀ ਤਿਆਗ ਦਿੰਦਾ ਨਾ ਆਪਣੀ ਭਰਤੀ ਦੇ ਭੇਹ ਆਪਣੀ ਮਰਜ਼ੀ ਦੇ ਛੱਡ ਦਿੰਦਾ ਗੁਰੂ ਦੇ ਅਗਾਂ ਚੱਲਦਾ ਗੁਰਬਾਣੀ ਚੱਲਦਾ ਫੇਰ ਸ਼ਰੋਣੀ ਸੁਖ ਸੁਖ ਹੁੰਦਾ ਸੁੱਖਾਂ ਦੇ ਸਿਰ ਸੁਖ ਹੁੰਦਾ ਸਦਾ ਸੁਖ ਹੁੰਦਾ ਤੇਰੇ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਠੀਕ ਹੈ ਜੀ ਗੁਰਮੁਖੀ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਗੁਰਮੁਖੀ ਉਦਾਸੀ ਦੇ ਕੋਈ ਇੱਕ ਮਨਮੁਖੀ ਉਦਾਸੀ ਹੈ ਇੱਕ ਗੁਰਮੁਖੀ ਉਦਾਸੀ ਹੈ ਉਦਾਸੀ ਦੋ ਪ੍ਰਕਾਰ ਦੀ ਹੋਗੀ ਹੁਣ ਇੱਕ ਤਾਂ ਉਦਾਸੀ ਸਧਾਰਨ ਉਦਾਸੀ ਘਰ-ਬਾਰ ਛੱਡ ਕੇ ਗਿਆਨ ਤਰਾਂ ਚਲੇ ਜਾਂਦਣ ਇਹ ਗੁਰਮੁਖੀ ਉਦਾਸੀ ਹੈ ਘਰ-ਬਾਰ ਦੇ ਵਿੱਚੇ ਰਹਿਣ ਵਾਲੀ ਉਦਾਸੀ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਗੁਰਮੁਖ ਮਾਇਆ ਦੇ ਵਿੱਚ ਹੀ ਮੰਨਿਆ ਨਹੀਂ ਹੋਇਆ ਉਹਨੇ ਆਪਣਾ ਕੁਝ ਠੀਕ ਹੈ ਜੋ ਕੁਛ ਹੈ ਸੋ ਤੇਰਾ ਜੇ ਮੰਨਿਆ ਹੋਇਆ ਉਹਨੇ ਅੰਦਰੋਂ ਸੋਭੀ ਸਦੀ ਫਿਰ ਗੁਰਬਖੀ ਉਹਦਾ ਸੀ ਹੈ ਗੁਰਮੁਖ ਮਾਇਆ ਵਿੱਚ ਉਹਦਾ ਮਾਇਆ ਦੇ ਵਿੱਚ ਉਹਦਾ ਸੀ ਮਾਇਆ ਤੋਂ ਭੱਜ ਕੇ ਵੀ ਉਹਦਾ ਸੀ ਹੈ ਮਾਇਆ ਨੂੰ ਛੱਡ ਕੇ ਵੀ ਉਹਦਾ ਸੀ ਕੋਲੀ ਸੁਰਤ ਮਾਇਆ ਚ ਧਿਆਨ ਮਾਇਆ ਚ ਬੋ ਮਾਇਆ ਚ ਉਦਾਸੀ ਸੋ ਜੇ ਸੱਚ ਰਹੇ ਲਿਵ ਲਾਈ ਉਦਾਸੀ ਗੁਰਮੁਖੀ ਤਹੂਗੀ ਇਹ ਲਿਵ ਸੱਚ ਨਾਲ ਜੁੜਿਆ ਰਹੁ ਅੰਤਰਾ ਆਤਮਾ ਦੀ ਆਵਾਜ਼ ਨਾਲ ਜੁੜਿਆ ਰਹੁ ਗੁਰਬਾਣੀ ਦੇ ਫੇਸ ਨਾਲ ਜੁੜਿਆ ਰਹੁ ਗੁਰਬਾਣੀ ਦੀ ਖੋਜ ਕਰਦਾ ਰਹੁ ਗੁਰਬਾਣੀ ਦਾ ਖੋਜੀ ਬਣਿਆ ਰਹੁ ٹھیک ہے ਜੀ چنتا مول نہ ہووی ہر نام رجاں آ گئے کٹا دا مطلب ہی نہیں رہ گیا کٹا پھر کیڑی ہو گی ہر نام رجن ہوتے کیو ہر نام دے نہ رجے ہر نام نہ رجیو ہر نام نہ ملوں گا تریپ تر ہو گا ਨਾਨਕ ਨਾਮ ਬਿਨਾ ਨਹਿ ਛੁਟੀ ਐ ਹਮੇ ਪਚੇ ਪਚਾਈ ਨਾਨਕ ਦਾ ਨਾਮ ਤੇ ਬਿਨ ਉਹ ਨਹੀਂ ਛੁੜਕਾਰਾ ਹੁੰਦਾ ਭਾਈ ਤਜਰਬਾ ਕਰਦੇ ਨੇ ਲੋਕ ਬਹੁਤ ਸਾਰੇ ਦੁਨੀਆਂ ਦੇ ਵਿੱਚ ਦੇਖ ਲਓ ਨਾਮ ਤੇ ਬਿਨ ਨਹੀਂ ਹੋ ਸਕਦਾ ਮਸਲਾ ਹੱਲ ਰਜਾਈ ਜਾ ਸਕਦਾ ਰੋਪ ਤੇ ਬਿਨ ਉਹ ਸੰਤੋਖ ਨਹੀਂ ਆਉਣਾ ਗਿਆਨ ਤੇ ਬਿਨ ਸੰਤੋਖੇ ਰਜਣ ਬਿਨਾ ਸੰਤੋਖ ਨਹੀਂ ਕੋਈ ਰਾਜ ਤੂੰ ਪ੍ਰਭੂ ਰੂਰਤਿ ਦਰਤੇ ਸਭ ਕਾਜੈ ਨਾਮ ਬਿਨਾ ਨਹੀਂ ਰਾਜ ਸਤਨਾ ਕੋਈ ਵੀ ਦੇਖ ਕੇ ਦੂਰ ਤੇ ਮੇਨੂੰ ਠੀਕ ਹੈ ਨਾਨਕ ਨਾਮ ਬਿਨਾ ਨਾ ਛੁਟੀਏ ਹਮੇ ਪਚੇ ਪਚਾਈ ਤੇਰੇ ਜਨਾਨੀ ਛੜਦੀ ਜਾਲਦੀ ਹੈ ਕੜੀ ਕੜੀ ਕੜੀ ਕੜੀ ਸਾੜੀ ਜਾਂਦੀ ਹੈ ਦਸੜੇਵਾਂ ਨਹੀਂ ਜਾਂਦਾ ਸਭ ਤੋਂ ਘੋਟੀ ਸਭ ਤੋਂ ਖਤਰਨਾਕ ਤਰੀਕਾ ਕਿਤਾ ਇਹ ਨਹੀਂ ਖੜਾ ਛੱੜਦੀ ਇਹ ਤਾਂ ਖੜਾ ਛੜਉਣੇ ਲੋਕ ਚਾਹੀਦਾ ਸੰਤੋਖ ਚਾਹੀਦਾ ਕਿ ਜੇ ਧਿਆਨ ਚਾਹੀਦਾ ਹਮੇ ਪਚਾਏ ਪਰ ਪਚੀ ਜਾਂਦੇ ਨੇ ਬੁੱਧੀ ਛੋਟੀ ਹੋਈ ਜਾਂਦੀ ਧਿਆਨ ਦਾ ਸਿਮਤ ਤੈਰੇ ਹੋਈ ਜਾਂਦਾ ਪਚੇ ਪਚਾਏ ਅੱਛਾ ਠੀਕ ਹੈ ਜੀ ਹਮੇ ਕਰਕੇ ਗਿਆਨ ਦਾ ਜਿਹੜਾ ਦਾਇਰਾ ਉਹ ਘਟੀ ਜਾ ਰਿਹਾ ਘਟੀ ਜਾ ਰਿਹਾ ਠੀਕ ਹੈ ਜੀ ਪੌੜੀ ਜਿਨ ਹਰ ਹਰ ਨਾਮ ਧਿਆਇਆ ਤਿਨੀ ਪਾਇੜੇ ਸਰਬ ਸੁਖਾਂ ਸਭ ਜਨਮ ਤਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾਂ ਉਹਨੇ ਸਾਰੇ ਸੁਖ ਪ੍ਰਾਪਤ ਕਰ ਲਏ ਕੋਈ ਐਸਾ ਸੁਖ ਦੁਨੀਆ ਦਾ ਨਹੀਂ ਰਹੇਗਾ ਜਿਹਨੂੰ ਪ੍ਰਾਪਤ ਨਹੀਂ ਹੋਇਆ ਸਰਬ ਸੁਖਾ ਰਿਤ ਚਰਨ ਹਰ ਪਵਜਲ ਵਿਖਮਤਰੰ ਸਰਬ ਸੁਖ ਦੇ ਦ ਚਰਨ ਹਰ ਜਿਹਨੂੰ ਹਰ ਕੇ ਚਰਨ ਮਿਲ ਕੇ ਉਹ ਸਾਰੇ ਸੁਖ ਮਿਲਦੇ ਦਾ ਐਸਾ ਨਹੀਂ ਜਿਹੜਾ ਉਹ ਨਹੀਂ ਮਿਲਿਆ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਹਨਾਂ ਨੇ ਹਰ ਰਾਮ ਦੀ ਭੁਖ ਲੱਗਈ ਹਰ ਰਾਮ ਦੀ ਲੱਗਾ ਭੁਖ ਉਤ ਭੁੱਖੇ ਚਾਹੇ ਗਾ ਖਾਏ ਚਲਿਏ ਦੁੱਖ ਉਹਨਾਂ ਦਾ ਦਾ ਸਾਰਾ ਜਨਮ ਸਫਲ ਹੋ ਗਿਆ ਹਾਲਾਫ ਦੀ ਭੁੱਖ ਲੱਗਣੀ ਸਭ ਤੋਂ ਔਖੀ ਗੱਲ ਹੈ ਸਭ ਤੋਂ ਮੁਸ਼ਕਲ ਗੱਲ ਹੈ ਆਖਰੀ ਗੱਲ ਹੈ ਭੁੱਖ ਲੱਗਣੀ ਲੋਭ ਦੀ ਲੋਭ ਦੀ ਜੂਰੂ ਚ ਸੂੜ ਕੇ ਇੱਛਾ ਹੋਣੀ ਹੋਰ ਗੱਲ ਹੈ ਜੂਰੂ ਜੂਰੂ ਚ ਲਾਲਚ ਦੇ ਬਸ ਬਲੂਗਾ ਬਲੂਗਾ ਲੋਭ ਤੋਂ ਗੱਲ ਹੋ ਹੈ ਧਾਮ ਦੀ ਭੁੱਖ ਲੱਗਣੀ ਗੱਲ ਹੋ ਹੈ ਠੀਕ ਹੈ ਜਿਹਨੂੰ ਨਾਮ ਦੇ ਕੇ ਆਈ ਉਹਦੇ ਸਾਰੇ ਦੁੱਖੋ ਭੁੱਖ ਖਾ ਜਾਂਦੀ ਐ ਉਦ ਭੁੱਖ ਐ ਖਾਏ ਚੱਲੀ ਐ ਦੁੱਖ ਇਹ ਦੁੱਖੋ ਭੁੱਖ ਖਾਂਦੀ ਐ 1 ਪਦਵੀ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਤ੍ਰਿਯ ਆਪਾਸ ਵਿੱਚ ਪ੍ਰਵੇਸ਼ ਕਰਨ ਵਾਸਤੇ ਨਾਮ ਦੀ ਭੁਖ ਲਗੜੀ ਜ਼ਰੂਰੀ ਐ ਬਸ ਪੱਕੇ ਉਹ ਤਾਂ ਥੱਲੇ ਰਹਿ ਗਿਆ ਸਭ ਕੁਝ ਆ ਨਾਮ ਦੀ ਭੁੱਖ ਪੈਦਾ ਹੋ ਗਈ ਲੋ ਠੀਕ ਹੈ ਜੀ ਫੇਰ ਤਾਂ ਬਚਨ ਅਰਾਧਿਆ ਤਿੰਨ ਵਿਸਰ ਗਏ ਸਭ ਦੁੱਖਾਂ ਦੁੱਖਾਂ ਵਾਲੇ ਵਿਸਰ ਗਏ ਗੁਰ ਬਚਨ ਅਰਾਧਿਆ ਜਿਨ੍ਹਾਂ ਨੇ ਅਰਾਧਿਆ ਕੀ ਹੈ ਉਹ ਭੁੱਖੇ ਰਹਿਦੀ ਹੈ ਉਕੇ ਦੇ ਦੇ ਮੈਨੂੰ ਆਰਾਧਨਾ ਭੁੱਖ ਦੀ ਹੋ ਕੀਤੀ ਹੈ ਲੋੜ ਦੀ ਆਰਾਧਨਾ ਭੁੱਖ ਦੀ ਆਰਾਧਨਾ ਦੀ ਜੋ ਦੌਂਦੀ ਦੀ ਭੁੱਖ ਹੈ ਦੀ ਭੁੱਖ ਹੈ ਆਰਾਧਨ ਆਰਾਧਨ ਦੀ ਕਾ ਹਰਾਗ ਦਾ ਮਹਾਰਾਜ ਨਾ ਤਾਂ ਆਰਾਧਨਾ ਨਾਮ ਦੀ ਭੁੱਖ ਨਾਮ ਦੀ ਆਰਾਧਨਾ ਵੀ ਆਰਾਮ ਦੀ ਹੋ ਹੈ ਲੋੜ ਮੇ ਨਾਮ ਦੀ ਹੋ ਹੈ ਠੀਕ ਹੈ ਬਹੁਤ ਉੱਚੀ ਅਵਸਥਾ ਖਰੇ ਦੀ ਅਵਸਥਾ ਹੈ اے سنت بھلے گੁਰ سکھ ہیں جن نہ ہی چنت پرائی چکھاں تے پن جوت پن ایک گੁਰ سکھ او تا سنت بھلے نے گੁਰ سکھ جنہاں نو کوئی چنتا ہی نہیں پرائی چنتا چنت پرائی چکھ کسی نے بھی چنتا نہیں کوئی بھی چنتا نہیں یوں رہ پتا سب حکم دے میں کسے دی چنتا کر کے بھی ਜੇ ਕੋਈ ਚਿੰਤਾ ਵਾਲਾ ਵੀ ਆਉਂਦਾ ਹੈ ਜੇ ਕੋਈ ਦੁਖੀ ਵੀ ਆਉਂਦਾ ਹੈ ਉਹ ਦੁਖੀ ਨਹੀਂ ਹੁੰਦੇ ਉਹਦਾ ਦੁੱਖ ਦੇਖ ਕੇ ਉਹ ਕਹਿੰਦੇ ਭਾਈ ਪਾਵੇ ਬੰਦੂ ਸੱਪਾ ਲਈ ਕਿ ਉਹਨੂੰ ਜਗੋਂ ਦਿੰਦੇ ਨੇ ਤੂੰ ਪਾਣੇ ਤੇ ਖਰਚਾ ਰੁਕ ਜਾ ਪਾਣਾ ਬੰਦਾ ਟਕੜਾ ਹੋ ਜਾਏਗਾ ਪਾਣਾ ਬੰਦਾ ਕੁਝ ਵੀ ਨਹੀਂ ਰਹੇ ਦੁੱਖ ਚੱਲਦੇ ਸਨ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਬੋਲੇ ਸੁੱਖ ਚਲੇ ਔਰ ਪੈਲੀ ਜਾ ਕੇ ਕਲਤ ਨਾ ਮਾਟੀ ਬਾਲੇ ਉਹ ਬਦੇ ਦੇ ਜ਼ਰੂਰ ਉਹ ਸ਼ਬਦ ਸੁਣਾ ਦਿੰਦੇ ਨੇ ਉਸ ਨੂੰ ਇੰਨਾ ਤਕੜਾ ਕਰ ਦਿੰਦੇ ਅਪੜ ਲੱਗ ਕੇ ਪੜਾ ਦਿੰਦੇ ਜ਼ਰੂਰ ਅਰਦਾਸ ਨਹੀਂ ਕਰਦੇ ਉਹਦੀ ਇਹਦੇ ਦੁੱਖ ਕੱਟੇ ਜਾਣ ਨਾ ਨਾ ਇਹ ਤਾਂ ਅਪਰਾਧ ਹੈ ਇਹ ਤਾਂ ਹੁਕਮ ਨਭਰੋ ਨਾ ਉਹਨੂੰ ਆਪਣੇ ਵਰਗਾ ਪਾਠ ਪੜਾ ਦਿੰਦੇ ਆਪਣੇ ਵਾਲਾ ਹੀ ਪਾਠ ਆਪਣੇ ਵਾਲੀ ਉਹ ਦਵਾਈ ਦੇ ਦਿੰਦੇ ਲੋਭ ਦੀ ਠੀਕ ਹੈ ਤਨ ਤਨ ਤਿਨਾ ਕਾ ਗੁਰੂ ਹੈ ਜਿਸ ਤਨ ਗੁਰੂ ਹੈ ਉਹਨਾਂ ਦਾ ਗੁਰੂ ਤਨ ਤੁੰ ਹੈ ਜਿਹੜਾ ਅੰਮ੍ਰਿਤ ਬਾਲ ਉਹਨਾਂ ਦੇ ਮੂੰਹ ਨੂੰ ਲਾ ਦਿੰਦਾ ਹੈ ਉਹ ਅੰਮ੍ਰਿਤ ਫਲ ਜਿਹੜਾ ਆਪ ਛਕਿਆ ਉਹੀ ਉਹਨੂੰ ਛਕਾ ਦਿੰਦਾ ਸੁੱਖਾਂ ਦੇ ਖਿਲਾਫ ਅੰਮ੍ਰਿਤ ਫਲ ਦੇ ਰੰਗ ਨੂੰ ਠੀਕ ਹੈ ਦੁੱਖ ਨੀ ਲੱਗਦੇ ਪਾਣੀ ਨੂੰ ਪਿਟਾ ਕਰਕੇ ਮਨੋ ਦੁੱਖ ਨੀ ਲੱਗਦਾ ਕੋਈ ਵੀ ਦੁੱਖ ਤਾਂ ਦਾਰੂ ਹੈ ਸੁਖ ਰੋਕ ਪਿਆ ਜੇ ਦੁੱਖ ਦਾਰੂ ਕਹਿੰਦੇ ਸੁਖ ਰੋਗ ਹੈ ਆਪੇ ਦੁੱਖ ਤੋਂ ਖੁਸ਼ੀ ਲਿਆ ਜਾਂਦਾ ਠੀਕ ਹੈ ਜੀ ਇੱਥੇ 6ਵੇਂ ਪੌੜੀ ਦੀ ਸਮਾਪਤੀ ਹੈ ਜੀ